ਜਾ ਜਾਇ ਕਾਰ ਜਾਸ ਜਗ ਅੰਦਰ ਹੂੰ ਕਾਰ ਨਾ ਸਾਰੀ ਦੁਨੀਆ ਕਰਦੀ ਹੂੰ ਹੂੰ ਸਾਰਾ ਅੰਦਰ ਜੀ ਵੀ ਜਾਇ ਜਾਇ ਕਾਰ ਕਰਦੀ ਏ ਦੁਨੀਆ ਹੂੰ ਹੂੰ ਔਰ ਇਹਦਾ ਕਿੱਥੇ ਹੈ ਉਹ ਹਿਰਦੇ ਦੇ ਕਿਸੇ ਹਿੱਸੇ 'ਚ ਰਹਿੰਦਾ ਹੈ। ਅੱਛਾ ਜੀ। ਕਿਉਂ ਕਿਸੇ 'ਚ ਰਹਿੰਦਾ? ਹੂੰ। ਆ ਦੇਖ ਲਓ ਰਹਿੰਦਾ ਲੱਗਦਾ ਨਹੀਂ ਹੈ। ਹੂੰ। ਐਸੀ ᔪਗਤੀ ਨਾਲ ਰਹਿੰਦਾ। ਸ਼ਿਵ। ਹਾਂ ਜੀ। ਸ਼ਿਵ ਸ਼ਿਵ ਬੁੱਧਰ ਕਹਿੰਦਾ ਨਾਲ ਰਹਿੰਦਾ। ਬਿਲਕੁਲ ਅਦਰੇ ਹੈ। ਹੂੰ। शिव की पूरी जदी बाहर बनाई है ना ना ने अच्छी ओ शिव की पूरी जो मैं आया से अपना सरदार बना लिया पूरा किसी ने बना लिया असल ये तेरी गल है हम्म हम्म व्हाट्सएप ਸ਼ੇਵਰਨਨ ਸ਼ੇਵਰ ਬੁੱਧਰ ਕਹਿ ਲੋ ਜਾਂ ਸ਼ੇਪੁਰੀ ਕਹਿ ਲੋ ਸ਼ੇਵ ਬੁੱਧਰ ਹੈ ਸ਼ੇਵ ਰਹਿੰਦਾ ਬੁੱਧਰ ਦੇ ਵਿੱਚ ਉਹ ਕਬੀਰ ਕੇ ਜਨਨ ਚਾਹਦਾ ਸ਼ੇਪੁਰੀ ਜੀ ਤੁਸੀਂ ਬਾਹਰ ਬਣਾਏ ਬੈਠੇ ਹੋ ਇਸ ਪੜੀ ਸ਼ੇਪੁਰੀ ਵਿੱਚ ਬੁੱਧਾ ਅੱਛਾ ਜੀ ਭਾਸ਼ੇ ਜੀ ਹੋਦੀ ਇਹ ਨਹੀਂ ਕਹਿੰਦਾ ਕਿ ਛੇਪਰੀ ਹੁੰਦੀ ਦੀ ਇਹ ਸ਼ਿਵ ਮੰਦਰ ਹੁੰਦਾ ਦੀ ਹੂੰ ਹੂੰ ਪਰ ਛੇਪਰੀ ਏ ਨਹੀਂ ਜਿਹੜੀ ਤੁਸੀਂ ਬਣਾਈ ਬੈਠੀ ਹੂੰ ਹੂੰ ਅਸੀਂ ਇਹ ਅੰਮ੍ਰਿਤ ਸਰੋਵਰ ਹੁੰਦਾ ਦੀ ਹੂੰ ਪਰ ਅੰਮ੍ਰਿਤ ਸਰੋਵਰ ਬਹਾਰ ਨਹੀਂ ਹੁੰਦਾ ਹੂੰ ਹੂੰ ਸਾਧਗੋੜ ਨੂੰ ਅੰਮ੍ਰਿਤ ਸਰੋਵਰ ਬੁਣਿਆ ਸਾਧਗੋੜ ਆਪੇ ਅੰਮ੍ਰਿਤ ਸਰੋਵਰ ਹੈ ਇਹ ਮਰ ਸ਼ਿਵਕੀ ਪੁਰੀ ਨੂੰ ਕਹਿੰਦਾ ਸ਼ਿਵਕੀ ਪੁਰੀ ਬਸ ਹੈ ਬੁੱਧਸਾਰ ਹੂੰ ਹੂੰ ਕਿਹੜੀ ਬਵੇਕ ਬੁੱਧੀ ਸਾੜ ਬੁੱਧੀ ਹੈ ਨਾ ਉਹ ਸ਼ਿਵਕੀ ਪੁਰੀ ਚ ਪਸਦੀ ਹੁੰਦੀ ਹੈ ਲੋੜੇ ਦਾ ਬਵੇਕ ਬੁੱਧੀ ਹੈ ਉਹ ਦੀ ਹੂੰ ਖਾ ਸ਼ਿਵੀ ਤਾਂ ਬਵੇਕ ਬੁੱਧੀ ਜੇ ਤੂੰ ਇਹ ਤਾਂ ਬਵੇਕ ਬੁੱਧੀ ਦਾ ਵਿਰੋਧ ਕਰਦੇ ਹੂੰ ਤਾਂ ਹੈ ਨਹੀਂ ਇਹਦਾ ਪ੍ਰਚਾਰ ਹੈ ਦੀ ਮੇਰੇ ਹਿਰਦੇ ਚ ਬਵੇਕ ਬੁੱਧੀ ਆ ਉਸ ਵੇਲੇ ਕਬੀਰ ਦੇ ਹਿਰਦੇ ਚ ਬਵੇਕ ਬੁੱਧੀ ਹੈ ਹੂੰ ਕਵੀ ਦਾ ਕਹਾਣਾ ਦਾ ਮਤਲਬ ਹੈ ਕਿ ਉਹ ਹਰਦਾ ਸ਼ੇਪੂਰੀ ਹੈ ਹੂੰ ਉਹੀ ਗੱਲ ਆ ਕਹਿ ਰਹੇ ਜੀ ਤੇ ਉਸੇ ਤਰੀਕੇ ਨਾਲ ਗੱਲ ਹੋਈ ਆ ਪਾਟਣ ਹੁੰਦੀ ਹੈ ਨਾ ਜਿਹੜੇ ਸ਼ਿਵ ਦੀ ਸ਼ਿਵ ਸ਼ਕਤੀ ਆਪ ਪਾਏ ਕੇ ਕਰਤਾ ਆਪੇ ਹੁਕਮ ਬਤਾਏ ਵੇਣਾ ਵਾਲਾ ਸ਼ਿਵ ਨਹੀਂ ਆ ਉਹ ਜਿਹੜਾ ਇਹ ਹੁੰਦਾ ਹੈ ਸ਼ਿਵ ਜਲਵ ਹੈ ਉਹ ਸ਼ਿਵ ਪ੍ਰਾਤਮਾ ਦਾ ਰੂਪ ਰੱਬ ਦਾ ਰੂਪ ਹੂੰ ਹੂੰ ਜਿਹੜਾ ਜਨਮ ਲੈਂਦਾ ਉਹ ਸ਼ਿਵ ਨਹੀਂ ਅੱਦਾ ਅੱਦਾ ਜਿਹੜਾ ਜਨਮ ਲੈਂਦਾ ਉਹ ਨਹੀਂ ਜਿਹੜਾ ਬੁੱਢੇ ਬਚਵਾ ਦਾ ਉਹ ਸ਼ਿਵ ਹੈ ਹੂੰ ਜਿਹੜਾ ਹੈਗਾ ਮਹਾਰਿ ਬੁੱਧਾ ਰਾਜੇ ਦਾ ਪਰ ਬੁੱਧਾਰਾ ਨੂੰ ਬੁੱਧਾ ਸ਼ਿਵਦਾਈ ਮੰਦਿਰੇ ਬਾਤ ਇਸ ਬੁੱਧਰ ਵਿੱਚ ਰਹੇ ਜੈ ਜੈ ਕਾਲ ਜਸ ਜਗ ਮੰਦਿਰ ਦਾਗ ਤੁਗਤ ਰਹੇ ਸ਼ਿਵ ਰਹੇ ਇਸ ਬੁੱਧਰ ਉਦਰੇ ਰਹੇ ਨੇ ਉਦਦਰ ਦੇ ਅੰਦਰੇ ਰਹਿੰਦਾ ਵਿਚੇ ਰਹਿੰਦਾ ਹਾਂ ਜੀ ਗੁਰਪੂਰਾ ਪਾਇਓ ਵਡਭਾਗੀ ਲਿਵ ਲਾਗੀ ਮੈਦਨ ਪਰ ਸਹਿਤਾ ਹਾਂ ਗੁਰਪੂਰਾ ਪਾਇਓ ਵਡਭਾਗੀ ਵੱਡੇਆਂ ਭਾਗਾਂ ਕਰਕੇ ਹੂੰ ਹੂੰ ਪੂਰਾ ਸਤਗੁਰ ਮਿਲ ਗਿਆ ਆ ਪੂਰਾ ਮੈਨੂੰ ਗਿਆਨ ਮਿਲ ਗਿਆ ਹੂੰ ਅਜੇ ਪੱਟਤਾ ਹੀ ਕਹੂ ਮੈਨੂੰ ਪੂਰਾ ਸਤਗੁਰ ਮਿਲ ਵਿਅਕਤੀ ਮਿਲ ਗਿਆ ਕੋਈ ਐਸਾ ਸਤਪੁਰਖ ਜੀ ਜਾਣਿਆ ਸੀ ਮੈਨੂੰ ਉਹ ਮਿਲ ਗਿਆ ਹੂੰ ਇਹਨੇ ਬੱਡੇ ਮੈਨੂੰ ਪੂਰਾ ਗੁਰ ਮਿਲ ਗਿਆ ਗੁਰਬਾਣੀ ਪੂਰੇ ਗੁਰ ਕੀ ਹੋਈ ਹੈ ਠੀਕ ਹੈ ਜੀ ਹਾਂ ਪੂਰੇ ਗੁਰ ਕੀ ਪੂਰੀ ਤੀਖਿਆ ਹੂੰ ਹੂੰ ਉਹdio ਉਹਦਾ ਯਿਆਦ ਪੂਰਾ ਹੁੰਦਾ ਤੀਖਿਆ ਉਹਦੀ ਉਹਦੀ ਹੂੰ ਜਿਵੇਂ ਪੰਦ ਪਸੇਤ ਸਾਜੀ ਗੁਰਪੂਰਾ ਪਾਇਓ ਵਰਭਾਗੀ ਹੂੰ ਵੇਦਨੀ ਫਰਸਤਾ ਹੂੰ ਵੇਦਨੀ ਫਰਸਤਾ ਨਿਬਲ ਕੀ ਹੋਈ ਐ ਹੂੰ ਨਿਬਲ ਗਈ ਐ ਵੇਦਨੀ ਜਿਹੜੀ ਐ ਨਾ ਉਹਦੀ ਸਰੀਰ ਪਰਬਤ ਮੇਦ ਦੀ ਸੰਤੋਸ਼ਾ ਵਾਲਾ ਮੇਦ ਦੀ ਮੇਦਾ ਜਰਬੀਤ ਹੋ ਗਿਆ ਤੇ ਹੂੰ ਅੱਛਾ ਇਹਦਾ ਭਾਰ ਤਾਂ ਉਹ ਬਰਦਾਸ਼ਤ ਕੀਤਾ ਹੋਇਆ ਇਹਦੀ ਲੋਡ ਨਹੀਂ ਹੈ ਇਹਦਾ ਤਾਂ ਹੁਣ ਬੋਝ ਹੀ ਲੱਗਦਾ ਹੈ ਇਹ ਬੋਝ ਸਹਿਣਾ ਪੈਂਦਾ ਹੈ ਇਹ ਇਹ ਇਸ ਬੋਝ ਦੇ ਸਹਤ ਹਮਤ ਇਹਦੀ ਸਰੀਰ ਵੀ ਭਾਵੇਂ ਨਾਲੇ ਹੈ ਹੋਈ ਆ ਫੇਰ ਵੀ ਤਾਂ ਤੇ ਸ਼ਵਨਾਂ ਜੁੜੀ ਹੋਈ ਹੈ ਇਹ ਸਰੀਰ ਬਾਹਰ ਦੇ ਹੈਗਾ ਹੂੰ ਹੂੰ ਸਰੀਰ ਦਾ ਬਾਹਰ ਬਾਹਰ ਨਾਲੇ ਚੁੱਕਿਆ ਹੋਇਆ ਹੈ ਹੂੰ ਇਹ ਪੰ ਇਹ ਬੋਟਲੀ ਬਾਹਰੇ ਵੱਧ ਕੇ ajo ਸੱਤੇ ਚੁੱਕੀ ਲੱਗੀ ਹੋਈ ਹੈ ਠੀਕ ਹੈ ਸਰੀਰ ਦੇ ਸਰੀਰ ਦਾ ਸਰੀਰ ਹੋ ਹੋਏ ਵੀ ਲੱਗ ਲੱਗੀ ਹੋਈ ਹੈ ਉਹ ਕਹਿੰਦੇ ਤੇ ਜਨਾਜ਼ਾ ਸਰੀਰ ਹੈ ਲੱਗ ਲੱਗੀ ਹੁੰਦੀ ਹਾਂ ਨੋਕੀ ਦੀ ਮਿਲ ਸਕਦੀ ਹੈ ਕਹਦਾ ਹੋਇਆ ਹੋਇਆ ਹਾਂਜੀ ਭੈ ਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਬਖਤਾ ਭੈ ਪੰਜਨ ਪਰ ਪੀਰ ਨਿਵਾਰਣ ਕਿਆ ਗੱਲੂ ਉਹਦੇ ਪਾਇਆ ਤਕਲੀਫ ਦੁੱਖ ਸਾਰੇ ਦੂਰ ਹੋ ਜਾਂਦੇ ਨੇ ਹੂੰ ਹੂੰ ਕਾਲੋ ਸਾ ਹਾਲ ਪਟ ਹੈ ਕੋਈ ਜੱਤ ਕਹਤਾ ਮੈਂ ਐਸਾ ਤੇਰਾ ਜੱਤ ਕਹਿ ਰਿਹਾ ਦੁੱਖ ਦੂਰ ਕਰ ਦਵੇ ਪੈ ਜੋ ਸਾਰੇ ਦੁੱਖ ਪੈ ਜੋ ਹਾਏ ਆਪਣੇ ਨਾਲ ਵਿੱਚ ਬਹੁਤ ਬੜਾ ਦੁੱਖ ਹੈ। ਐ ਟੋਡਾ ਲੱਗਦਾ ਹੈ, ਦਰ ਬਹੁਤ ਬੜਾ ਦੁੱਖ ਹੈ। ਠੀਕ ਹੈ। ਜੀ। ਹਾਂਜੀ। ਕੁੱਲ ਸ਼ੋਡੀ ਗੁਰੂ ਦਾਸ ਤਨ ਧਰਮ ਪੂਜਾ। ਅਰਜੁਨ ਹਰ ਭਗਤਾ। ਸੋਢੀ ਗੁਰੂ ਰਾਮਦਾਸ ਤਾਂ ਹੂੰ ਹੂੰ ਇਹ ਸੋਢੀ ਕੋ ਲਾਇਆ ਇਹ ਸੋਢੀ ਕੋ ਲਾ ਲਗਾ ਹੂੰ ਹੂੰ ਸੋਢੀਆਂ ਦੀ ਗੁਲਾਇ ਜਦਦੇ ਹੀ ਕਰਦੇ ਨੇ ਸਭ ਸੋਢੀ ਉਹਨਾਂ ਨੇ ਸਿਰਫ ਇਹਦਾ ਭਰਮ ਹੈ ਭਰਮ ਭਰਮ ਦੂਰ ਚਲਣਾ ਹੁੰਦਾ ਇਕੱਲਾ ਇਹਨਾਂ ਸਿਰਮ ਕੱਲਾ ਪਰ ਹਜ਼ੂਰ ਕਰ ਲੈਣਾ ਪਰ ਬੇਜ ਹੋਰ ਕੋਈ ਵਕਾਰ ਹੈ ਨਹੀਂ ਤੇਰਾ ਦੋਈ ਮਤ ਢਾੜ ਕਾਲੀ ਦੁਰਮਤ ਉਹ ਵਕਾਰਾਂ ਚ ਪੈ ਗਿਆ ਉਹ ਪਹਿਲਾਂ ਆਪਣੀ ਆਪਣੀ ਪਿਛਲੇ ਬਾਥਰੂਮ ਪੱਲੂਗਾ ਫੇ ਦਵਾਰਾ ਕਢੂਗਾ ਜਿਹੜੀ ਸਿੱਧੀ ਦੋਈ ਪਹਿਲੀ ਉਹ ਸ਼ੁਰੂ ਜੇ ਇੱਕ ਮਤ ਖੜੀ ਜਾਂਦੀ ਹੈ ਐਡੀ ਪਹਿਲੀ ਪੈਂਦੀ ਹੋਈ ਨਹੀਂ ਉਹ ਛੋਡੀ ਹੈ ਉਹ ਛੋਡੀ ਠੀਕ ਹੈ ਤਾਂ ਰਾਹ ਨੇ ਛੋਡੀ ਨਾਲ ਜਿਹੜੇ ਗੁਰਮਤਿ ਤੋਂ ਬਿਨਾ ਪਹਿਲਾਂ ਕੋਈ ਹੋਰ ਮਤ ਲੈ ਲੈਂਦੇ ਫਿਰ ਨੇ ਉਹ ਦਾ ਫਰਕ ਦੱਸਿਆ ਹੋਇਆ ਵੇਦੀ ਛੋਡੀਆਂ ਦਾ ਠੀਕ ਨੇ ਸ਼ੁੱਧੀ ਕਰਨ ਸਿਰਫ ਜੋ ਅੰਦਰ ਭਰਮ ਦੀ ਬਲੀਨਤਾ ਸੀ ਉਹੀ ਦੂਰ ਕੀਤੀ ਐ ਜਨਮ ਜਨਮ ਕੋ ਜਦ ਜਨਮ ਕੀ ਇਸ ਬੰਕੋ ਮਾਲ ਲੱਗ ਗਈ ਠੀਕ ਹੈ ਕਾਹ ਹੋਇਆ ਸਿਆਹੋ ਜਦ ਬਜਨ ਜਨਮ ਦੀ ਆਖਰੀ ਦੂਰ ਕੀਤੀ ਜਨਮ ਦੇ ਵਿੱਚ ਆ ਕੇ ਆਦ ਸੀ ਨਾ ਆਦ ਲੈ ਕੇ ਆਏ ਸੀ ਉਹੀ ਦੂਰ ਕੀਤੀ ਐ ਵਿਆਦ ਹੋਈਓ ਨਹੀਂ ਉਹਦੇ ਅੰਦਰ ਓਕੇ ਦਾ ਰੋਪਾ ਦੋ ਤਾਂ ਹੋਈ ਹੀ ਹੋਏ। ਯਾ ਤਾਂ ਆਉਂਦੀ ਹੈ ਦੁਰਮਤਲ ਨਾਲ ਜੁੜਦੀ ਹੈ। ਹੂੰ ਹੂੰ। ਆਹ। ਠੀਕ। ਦੁਰਮਤਲ ਨਾਲ ਜੁੜੇ ਹੀ ਜਿਹੜੇ। ਹੂੰ ਨੇ ਵੇਦ ਪੜਿਆ, ਵੇਦ ਪਠੇ ਉਸ ਵੇਦੀ ਕਾਏ। ਜਿੰਦ ਨੂੰ ਗਿਆਨ ਪੜ ਕੇ ਪਹਿਲੀ ਬੰਤ ਦੂਜੀ। ਲਾਈਨ ਬਦਲੀ ਐ ਜਿਹਨਾਂ ਨੇ ਉਹ ਵੇਦੀ। ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਪੂਜਾ ਅਰਜਨ ਹਰਿ ਭਗਤਾ ਧਰਮ ਤੁਜਾ ਅਰਜਨ ਹਰਿ ਭਗਤਾ ਕੁਲ ਸੋਢੀ ਗੁਰੂ ਰਾਮਦਾਸ ਤਕ ਹੂੰ ਰਾਮਦਾਸ ਰਾਮਦਾਸ ਦੇ ਹਿਰਦੇ ਵਿੱਚ ਥੋੜੀ ਕੋ ਪਤਾ ਘਰ ਕੇੰਦਲੇ ਹੀ ਕਰਕੇ ਥੋੜੀ ਕੋ ਬਾਹਰਲੇ ਕਰਕੇ ਜੀ ਹਾਂ ਹਾਂ ਅੰਤਲੇ ਕਿਰਨ ਕਰਕੇ ਤੁਹਾਡੇ ਉਹ ਅੰਕੜੇ ਜਦੋਂ ਹਾਂ ਨੇ ਇਹ ਤਾਂ 1 ਵਜੇ ਨਹੀਂ ਰਹਿੰਦਾ ਹੂੰ ਹੂੰ ਇਹ ਬਹਿਲੇ ਹਾਂ ਹੂੰ ਹੂੰ ਸਰਬਤੋ ਜਾ ਹਰ ਜਿਹੜੂ ਹਰ ਜੁਗਿਆ ਸਰਬਤੋ ਜਿਆ ਹੂੰ ਹੂੰ ਦਾ ਜਗਾ ਵਰਦਾ ਤਾਰੂ ਕਿ ਕਿੰਨਾ ਵਰਦਾਰਾ ਹੈ ਸੱਚ ਦਾ ਜੰਦਾ ਵਰਦਾਰਾ ਹੈ ਹਮ ਹਮ ਪਰਮੇਸ਼ਰ ਤੁਝ ਆਪ ਹੀ ਹੈ ਹਮ ਹਮ ਤਾਰੂ ਕਿ ਤੁਝ ਉੱਚੀ ਰੱਖਦੇ ਜੋ ਮੇਰੀ ਇੱਜ਼ਤ ਹੈ ਉਹੋ ਜੈ ਕਿ ਜੇ ਆਪ ਥੁਪ ਲਿਆ ਆਪ ਧਰਮ ਦਾ ਕਿੰਨਾ ਸੱਚ ਦਾ ਕਿੰਨਾ ਆਪਣਾ ਬਣ ਚੁੱਕਿਆ ਹੋਇਆ ਤਾਰੂ ਤੇ ਹੈ ਹਰ ਭਗਤ ਹਮ ਹੈ ਹਰ ਭਗਤ ਹੈ ਅਰ ਅਰਜਨ ਹਰਪ ਦਾ ਹਜ਼ਾਰ ਹਰਪ ਦਾ ਹੈ ਅਰਜਨ ਹੂੰ ਹੂੰ ਹੂੰ ਆਪਣੀ ਇਰਤਰਾ ਕਰਾਇਆ ਪੂਰਾ ਭਗਤ ਹੈ ਹੂੰ ਹੂੰ ਇੱਥੇ ਫਿਰ ਅਰਜਨ ਗੁਰੂ ਵਾਸਤੇ ਦੱਸਿਆ ਹੈ ਕਿ ਅਰਜਨ ਅੱਖਰ ਦਾ ਅਰਥ ਦੱਸਿਆ ਇਹ ਅੱਖਰ ਦਾ ਅਰਥ ਹਮੇਸ਼ਾ ਕੋਈ ਨਹੀਂ ਸੀ ਹੁੰਦਾ ਹੂੰ ਹੂੰ ਕਿ ਗੁਣਵਾਚਕ ਲਫ਼ਜ਼ ਹੁੰਦਾ ਹੈ ਉੱਕੜੀ ਜੀ ਹੋਣਾ ਚਾਹੀਦਾ। ਅੱਛਾ ਜੀ। ਅੱਜ ਹਰ ਬਖਤਾ ਹੈ ਨਾ ਉਹ ਬਖਤਾ ਆਦਮੀ ਹੋਊਗਾ। ਠੀਕ ਹੈ ਜੀ। ਬਖਤਾ ਠੀਕ ਹੈ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਵਿਸਾਰਣ ਧਰਮ ਧੀਰ ਗੁਰਮਤ ਗੰਭੀਰ ਆ ਧਰਮ ਧੀਰ ਇਹ ਜਿਹਾ ਜੈਸਾ ਰੁੱਖ ਦਾ ਹੁੰਦਾ ਅੱਛਾ ਜੀ ਅਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇ ਰੰਗ ਬੜਾ ਫੇਰ ਜੁ ਹੁੰਦਾ ਰੁੱਖ ਚ ਫੜਨਾ ساری ਜ਼ਿੰਦਗੀ ਬੜਾ ਔਖਾ ਹੈ ਹੂੰ ਤੋਪੋ ਹੋਵੇ ਛਾਂ ਹੋਵੇ ਮੀਂਹ ਹੋਵੇ ਢੇਰੀ ਹੋਵੇ ਹੂੰ ਖੁਸ਼ੀ ਹੋਵੇ ਤੇ ਜੇ ਕੋ ਕੋ ਹੋਵੇ ਜੋ ਖੜਾ ਰਹਿਣਾ ਹੂੰ ਤੋ ਕੋਵੇ ਤੋਂ ਹੋਵੇ ਕੋ ਪੱਥਰ ਵੀ ਮਾਰ ਦੇਵੇ ਕਹਿੰਦੇ ਪੱਕੇ ਹੋਣ ਫਲ ਰੱਖ ਤੇ ਮਾਰੇ ਪੱਥਰ ਤੇ ਪੱਥਰ ਮਾਰਾਂ ਉੱਤੇ ਤੇ ਫੜ ਦੇ ਤੂੰ ਕਹਿੰਦਾ ਲਾਇ ਤੂੰ ਵਿਚਾਰ ਕੁਵੇ ਦਾ ਜੱਲ ਪੱਕੇ ਪੱਕੇ ਖਾਲੀ ਹੂੰ ਹੂੰ ਤੂੰ ਵੀ ਆਪਣਾ ਯਦੋ ਝਾੜ ਲੈ ਤੈਨ ਖਾਲੀ ਹੂੰ ਇਹ ਰੁਖਾਂ ਦੀ ਜਰਾਹਤ ਜਿਗਰਾ ਗੇਰਾ ਰੁਖਾਂ ਹੁੰਦਾ ਅਰਜਨ ਹਰ ਭਗਤ ਦਾ ਐਸੀ ਜਰਾਹਤ ਹੈ ਤ੍ਰਭ ਧੀਰਜ ਧੀਰਜ ਦੋਹਦਾ ਨਹੀਂ ਹੈ ਰੁਖ ਹੂੰ ਹੂੰ ਭਰੋਸਾ ਨਾ ਹੁੰਦਾ ਤੇ ਠੀਕ ਹੈ ਐਸਾ ਭਰੋਸਾ ਆ ਜਾਂਦਾ ਜੇ ਨੂੰ ਕਹਿੰਦੇ ਜੀ درخت ਨੂੰ ਮੈਂ ਜਿਹੜੇ ਵੱਡੇ درخت ਨੂੰ ਧਰਮ ਕਹਿੰਦੇ ਆਛਾ ਜੀ ਇੱਥੇ ਇਹਨਾਂ ਨੇ ਧਰਮ ਨੂੰ ਧਰਮ ਕਹਿਤਾ ਵੇ ਠੀਕ ਹੈ ਜੀ ਰੱਬ ਦੀਰਘ ਤਰਬ ਦੀਰਗ ਜਿਉ ਗਜਬਾਜ ਰਤ ਪਾਇਤ ਜਿਉ ਫਲ ਕੋ ਤਲ ਸੁੱਭ ਕੋ ਬੇਗ ਵਡਾਲ ਕੋ ਦਿਕਸਿਓ ਬਗਵਾ ਹਾਥੀ ਬੜੇ ਬੜੇ ਰੁਖਾ ਵਰਗੇ ਹਾਥੀ ਵੱਡੇ ਵੱਡੇ ਹਮ ਵੱਡੇ ਵੱਡੇ ਵੱਡਾ ਰੁੱਖ ਹੁੰਦਾ ਠੀਕ ਹੈ ਜੀ ਕੋਈ ਗੱਲ ਰੁਕ ਨਹੀਂ ਜਾਦਾ ਨਾ ਇੱਕ ਤਾਂ ਐ ਫਿਰ ਆ ਜੇ ਵੀ ਤੇ ਰਹਿੰਦਾ ਠੀਕ ਹੈ ਜੀ ਟੀਲੇ ਜੁਣ ਦਾ ਟੀਲ ਦੌੜਾਈ ਦੀ ਠੀਕ ਹੈ ਜੀ ਗੁਰਮਤ ਗਮ ਗੁਰਮਤ ਕੋਈ ਆਕਾਸ਼ ਤੋਂ ਜ਼ਿਆਦਾ ਕੋਈ ਨਹੀਂ ਭੀਲਦੀ ਹੈ ਰੁਕ ਤੋਂ ਜ਼ਿਆਦਾ ਕੋਈ ਚੀਜ਼ ਨਹੀਂ ਕੋਈ ਰੁਕ ਵੀ ਰੁਕ ਜਾਂਦਾ ਚੀਜ਼ ਹੈ ਸੇਤਨ ਵੀ ਰੁਕ ਦੇ ਵਿੱਚ ਹਾਂ ਰੁਕ ਵੀ ਜੀਵਨ ਵਾਲੀ ਚੀਜ਼ ਹੈ ਠੀਕ ਗੁਰਮਤ ਗੰਭੀਰ ਗੁਰਮਤ ਮੇਗਾ ਵੀ ਹੈ ਐਸਾ ਗੰਭੀਰ ਕਰਤਾ ਜੇ ਰੁਕਦੇ ਨਾ ਗੁਰਮਤ ਦੀ ਕਿਰਪਾ ਨੂੰ ਹੋਈ ਹੋਇਆ ਹਾਂ ਇਹ ਤਾਂ ਇਹ ਤਾਂ ਵਰਤ ਕਰਕੇ ਮਿਲੀ ਐ ਪਰ ਦੂਰਵਾਰਣ ਕਰਦੇ ਕੀ ਨੇ ਦੂਸਰੇ ਦੇ ਦੁੱਖ ਲੋਕਾਂ ਦੇ ਕੱਟ ਰਹੇ ਨੇ ਉਹਦੇ ਨਾਲ ਦੁੱਖਾਂ ਦੀਆਂ ਚਿੰਤਾਵਾਂ ਦੂਰ ਕਰ ਲੈਣ ਐ ਅਪਦੇਸ਼ ਲੋਕ ਹੂੰ ਜਾ ਰਹੀਆਂ ਨੇ ਹੁਕਮ ਪਾਹਾ ਰਹੇ ਨੇ ਆਨਾ ਬੁਨਿਕਾ ਚੰਤਾ ਵਿਸਰਗੀ ਹੂੰ ਚੁਪ ਬਿਚਰਗੇ ਹੂੰ ਪਾਰ ਦੁਖ ਬਿਸਾਰਨ ਹੂੰ ਸ਼ਬਦ ਸਾਰ ਹਰ ਸੰ ਸ਼ਬਦ ਸਾਰ ਹਰ ਸੰ ਸ਼ਬਦ ਸਾਰ ਹਰ ਸੰ ਉਧਾਰ ਸ਼ਬਦ ਸਾਰ ਜਿਹੜੇ ਸ਼ਬਦ ਨੇ ਹੂੰ ਸਾਰ ਸ਼ਬਦ ਦੇ ਤਤ ਤਤ ਦੀ ਗੱਲ ਕਰਦੇ ਹੂੰ ਕਾਲ ਥੋੜੀ ਕਰਦੇ ਨੇ ਗਿਆਨ ਬਹੁਤ ਹੁੰਦਾ ਹੂੰ ਹੂੰ ਛੋੜੇ ਲਫਜ਼ਾਂ 'ਚ ਬਹੁਤ ਵੱਡਾ ਗਿਆਨ ਹੁੰਦਾ ਹੂੰ ਹੂੰ ਛੋੜੇ ਸ਼ਬਦਾਂ 'ਚ ਬਹੁਤ ਵੱਡਾ ਅਰਥ ਹੁੰਦਾ ਹੈ ਹੂੰ ਸ਼ਬਦਾਂ 'ਚ ਬਹੁਤ ਵੱਡੀ ਗਹਿਰਾਈ ਦੀ ਗੱਲ ਹੁੰਦੀ ਹੈ ਹੂੰ ਹੂੰ ਅਨੁਸਾਰ ਕਹਿੰਦੇ ਨੇ ਹਰ ਜ਼ਮੋ ਦਾ ਉਡਾਰ ਜਿੱਤ ਕਹਿੰਦਾ ਆਹ ਤੋਂ ਜਿੰਨਾ ਹਰ ਉਦਾਰ ਹੈ ਨੀ ਉਦਾਰ ਆਪੇ ਜਮਾਰ ਹਰੀ ਜਨਾ ਉਦਾਰ ਹੂੰ ਇਹਦਾ ਹਰੀ ਦਾ ਜਤੋਦਾਰ ਉਦਾਰ ਹਰ ਕਮ ਉਦਾਰ ਅਹ ਨਿਵਾਰਨ ਹੂੰ ਆਉਂਦੇ ਹੂੰ ਉਹ ਜਿਹੜਾ ਉਹ ਤਾਂ ਖਤਮ ਕਰਨ ਵਾਲਾ ਹੈ ਹੂੰ ਉਹ ਦੇਵ ਨਿਵਾਰਣ ਹੂੰ ਸ਼ਬਦ ਇਹਨਾਂ ਥਾਰ ਸ਼ਬਦ ਹੈ ਹੂੰ ਆ ਬੇਵਰੂ ਰਿਵਾਰਡ ਕਰਨ ਵਾਲਾ ਸ਼ਬਦ ਦੀ ਗੱਲ ਹੈ ਸ਼ਬਦ ਹੈ ਇਹਦਾ ਹੰਕਾਰ ਰਹਿੰਦਾ ਹੀ ਨਹੀਂ ਕਿਤੇ ਹੂੰ ਆਰਾਮ ਸਾਰੇ ਤੋਂ ਤੋਂ ਵਰਣਾ ਕੋਸੋ ਹੂੰ ਹੂੰ ਉੱਥੇ ਸੰਪਰਦਾ ਦੇ ਲੋਕਾਂ ਵਾਸਤੇ ਨਹੀਂ ਉਪਦੇਸ਼ ਹੈ ਸਾਰੀ ਸਾਰੀ ਲੋਕਾਈ ਵਾਸਤੇ ਹੈ ਹੂੰ ਚੌ ਵਰਣਾ ਕੋਈ ਗੱਲ ਕਰਦਾ ਹੈ ਉਦਾਰ ਹੈ ਸਾਰਿਆਂ ਵਾਸਤੇ ਕਰਦਾ ਹੈ ਉਹ ਕਹਿੰਦਾ ਸਾਰੇ ਸਿੱਖ ਦੇ ਹੂੰ ਦਾ ਕਿਸੇ ਖਾਸ ਸਮਾਜ ਨਾਲ ਕੋਈ ਸੰਬੰਧ ਨਹੀਂ ਹੂੰ ਦਾ ਸੰਬੰਧ ਵਿਚਾਰਧਾਰਾ ਨਾਲ ਹੈ ਗੁਰਬਾਣੀ ਨੂੰ ਬੰਨਣਾ ਤੇ ਗੁਰਬਾਣੀ ਤੇ ਚੱਲਣਾ ਗੁਰਬਾਣੀ ਨੂੰ ਸਮਝਣਾ ਇਹ ਸਿੱਖੀ ਹੈ ਹੂੰ ਹੂੰ ਇੱਕ ਬਣਾ ਲੈਣਾ ਕੋਲ ਲੈ ਲੈਣੀ ਜਿਹੜੇ ਸਾਡੇ ਖਕਾਲ ਨੇ ਧਾਰਨ ਕਰ ਲੈਣ ਗੁਰਬਾਣੀ ਤੋਂ ਗੁਰਲੀ ਇਹ ਸਿੱਖੀ ਦਈ ਹੈ ਗੁਰਬਾਣੀ ਤੇ ਨਾ ਚੱਲਣਾ ਇਹ ਸਿੱਖੀ ਦਈ ਹੈ ਇਹ ਕਹ ਸਕੋ ਆਪਣੇ ਆਪ ਨੂੰ ਧੋਖਾ ਇਹ ਇਹ ਤਾਂ ਸੇ ਖੋਣ ਦਾ ਪਰ ਪਰਪਾਲਣ ਜਿਹੜਾ ਧਰਮ ਅਖਰ ਹੈ ਪਪਾ ਜੀ ਇਹ ਯਾਦਾਂ ਸਵੈਆਂ ਚਾਹੁੰਦਾ ਇਹ ਇਹਦਾ ਇਹਦਾ ਮਤਲਬ ਜੋ ਅਰਥ ਧਰਮ ਕਰਕੇ ਨੀ ਬਹੁਤਾ ਹੋਏਗਾ ਇੱਕ ਜਗ੍ਹਾ ਧਰਮ ਤੁਨਖ ਕਰ ਗयो ਭਗਤ ਸੀਲ ਸਰਬ ਨਾਲ ਤੀਰਜੋ ਤੇ ਅਬੂਦ ਏ ਵੀ ਆ ਜਾਂਦਾ ਹੈ タルਬ ਦਾ ਅਸਥਿਰ ਜਾ ਗਿਆ ਨਾਲ ਹਾਂ ਠਿਰ ਜਾ ਗਿਆ ਆ ਗਿਆ ਜਦ ਵੀ ਆ ਜਾਂਦਾ ਹੈ ਤੁਹਾਡੀ ਗੱਲ ਠੀਕ ਹੈ ਹੂੰ ਹੂੰ ਜਾਂ ਠਿਰ ਜਾਉਂਦਾ ਹੈ ਪਰ ਠੀਕ ਹੈ ਜੀ ਕਿ ਦਾ ਫਿਰ ਬਣਿਆ ਹੋਇਆ ਆਹ ਸਹੀ ਹਾਂ ਠੀਕ ਜੀ ਤਾਂ ਆੜ ਜਾ ਸਕਦਾ ਹੈ ਠੀਕ ਜੀ ਤਾਂ ਉਹ ਨੂੰ ਹੈ ਕਿ ਰੱਬ ਤਾਂ ਫਿਰਛ ਹੈ ਠੀਕ ਹੈ تیر ਜਿ ਗੱਲ ਹੈ ਠੀਕ ਜੀ ਰੁਖਦਾ ਗੁਣ ਹੈ تیر ਜਿ ਹੁੰਦੇ ਅੱਛਾ ਰੁਖਦੀ ਜਿਹੜਾ ਆਦਾ ਹੋਇਆ ਆਪਣੇ ਸਰਵੇਸ਼ਾ ਨੂੰ ਮੋੜ ਕੇ ਦੀ ਰਾਲ ਉਹ ਜਲਦਾ ਏ ਤੁਹ ਵੀ ਜਲਦਾ ਹੈ ਬਰਦਾਸ਼ਤ ਕਰਦਾ ਹੈ ਗਰਮੀ ਵੀ ਸਰਦੀ ਵੀ ਸਭ ਕੁਝ ਬਰਦਾਸ਼ਤ ਕਰਦਾ ਹੈ। ਉਹ ਇਹ ਡੋਲ ਖੜਾ ਰਹਿਨੇ। ਠੀਕ ਹੈ ਜੀ। ਇਹ ਡੋਲ ਲੈ ਉਹ ਉਹ ਵੀ ਪੈਦੀ ਆ ਫਿਰ ਵੀ ਇਹ ਨੇ। ਠੀਕ ਇਸ਼ਾਰੇ ਹੁੰਦੇ ਨੇ। ਹੂੰ। ਇਕੱਲਾ ਵੇਖਦੀਆਂ ਇਸ਼ਾਰੇ ਹੂੰ। ਹੂੰ। ਹਾਂ ਜੀ। ਪੰਜ ਭਈਆ। ਹਾਂ ਜੀ ਹਾਂ ਇਹ ਮਤਲਬ ਇਹ ਧਰਮ ਅਖਰ ਸੁਖਣੀ ਸਾਹਿਬ ਚ ਵੀ ਵਰਤੇ ਆ ਵੈਸੇ ਕਿੱਥੇ ਇਹਦੇ ਉੱਤੇ ਟਿੱਪੀ ਨਹੀਂ ਐ ਇੱਥੇ ਬਦਾਂ ਟਿੱਪੀ ਕਿਉਂ ਲਾਈ ਹੋਈ ਐ ਯੋਗ ਵਿਆਸ ਕਰਮ ਧਰਮ ਕਿਰਿਆ ਉਥੇ ਧਰਮ ਅੱਛਾ ਜੀ ਯੋਗ ਵਿਆਸ ਕਰਮ ਧਰਮ ਕਿਰਿਆ ਹੂੰ ਉਹਦਾ ਉਹਦੇ ਵਿੱਚ ਠੀਕ ਐ ਜੀ ਕਰਮ ਕਿਰਿਆ ਜਿਹੜੀ ਯੋਗ ਵਿਆਸ ਹੈ ਗੱਲ ਤੇ ਆਗ ਬੜ ਕੋ ਤੇ ਫਿਰਿਆ ਠੀਕ ਹੈ ਜੀ ਮਹਾਦਾਨ ਸ ਦੱਦੇ ਨਾਲ ਵੀ ਮੰਗੇ ਇਹ ਦੱਦੇ ਨਾਲ ਆ ਜਾਂਦਾ ਦਰਮਣ ਵੀ ਆ ਜਾਂਦਾ ਅੱਛਾ ਕਈ ਵਾਰ ਇਹ ਮੈਨੂੰ ਬੋਲੀਆਂ ਦੇ ਵਿੱਚ ਫਰਕ ਪੈ ਜਾਂਦਾ ਆਪਣਾ ਕਈ ਜਗ੍ਹਾ ਉਹ ਲਾਖ ਨੂੰ ਬੱਬੇ ਨਾਲ ਵੀ ਹੈ ਬਾਬੇ ਨਾਲ ਵੀ ਹੈ ਠੀਕ ਹੈ ਠੀਕ ਹੈ ਦਰਮਾ ਕਿ ਆ ਉਹ ਮਿਸ਼ਚਲ ਗ੍ਰਹਿਬੰਦ ਆ ਉੱਥੇ ਰਖ ਸਕੂਲ ਉੱਥੇ ਦਰਬ ਜ਼ਬੂਰ ਜਿਉਂਦੇ ਹਾਂਜੀ ਇੱਥੇ ਆਉਂਦਾ ਹਰ ਹਿੰਦਾ ਇਹ ਚਿੱਤ ਦਰਮ ਛਾਇਆ ਠੀਕ ਹੈ ਜੀ ਇੱਥੇ ਇੱਥੇ ਹੈ ਨਾ ਆਤਾ ਫਿਰ ਕਿਉਂਕਿ ਉਹਦੇ ਧੀਰਜ ਜਲਾ ਫਿਰ ਹੈ ਹੂੰ ਹੂੰ ਇਹ ਜ ਰੁੱਖ ਰੂਟਾ ਹੈ ਧਰਮ ਦਾ ਧੀਰਜ ਕੀ ਹੈ ਹੂੰ ਹੂੰ ਇਹ ਹੁੰਦਾ ਕੀ ਹਾਂ ਉਹ ਆ ਧੀਰਜ ਨੂੰ ਆਪਣਾ ਧਰਮ ਬਣਾਇਆ ਹੋਇਆ ਹੈ ਚਲੋ ਉਹਨਾਂ ਨੇ ਇਹ ਲਿਖ ਲਿਆ ਧੀਰਜ ਨੂੰ ਕੀ ਧਰਮ ਧਰਮ ਦਾ ਧੀਰਜ ਦੇ ਵਿੱਚੋਂ ਪੈਦਾ ਹੁੰਦਾ ਧਰਮ ਜੋ ਧੀਰਜ ਪੈਦਾ ਹੁੰਦਾ ਹਾਂਜੀ ਇਹ ਤਾਂ ਇਹ ਬਹੁਤ ਛੋਟਾ ਤੇ ਵੀ ਛੋਟੀ ਗੱਲ ਹੈ ਛੋਟੀ ਹੈ ਪਰ ਵੱਡੀ ਚੀਜ਼ ਹੈ ਤੁਹਾਨੂੰ ਚ ਹੋਰ ਬਹੁਤ ਕੁਝ ਹੈ ਹੂੰ ਠੀਕ ਹੈ ਜੀ ਹਾਂ ਗਿਆਨ ਮਨ ਚਾਉ ਨਾ ਹਟੇ ਗਿਆਨ ਸਤਗੁਰ ਗਿਆਨ ਸਤਪੁਰ ਦਾ ਜਿਹੜਾ ਗਿਆਨ ਦੇ ਰਹੇ ਨੇ ਇਹ ਮਹਾਨ ਦਾ ਸਭ ਤੋਂ ਵੱਡਾ ਦਾਨ ਦੇ ਨੇ ਹੂੰ ਹੂੰ ਮਹਾਨ ਦਾ ਸਤਪੁਰ ਦਾ ਗਿਆਨ ਦੇਣਾ ਹੂੰ ਹੂੰ ਪਾਣੀ ਕਿਹਾ ਘਟਦਾ ਨਹੀਂ ਹੈ ਸਦਾ ਹੀ ਚੌਕਦਾ 24 ਘੰਟੇ ਮੈਂ ਗਿਆਨ ਦਿੰਦਾ ਹੀ ਰਾਂ ਦਾਨ ਦੇ ਦਾਂ ਹੂੰ ਕਿਤੇ ਕਿਤੇ ਵੇਲੇ ਵੀ ਉਹਦੇ ਵਿੱਚੋਂ ਇਹ ਚੌੜਦਾ ਨਹੀਂ ਐ ਘਟਦਾ ਨਹੀਂ ਹੂੰ ਕੋਈ ਸਮਾਂ ਹੋਵੇ ਹੂੰ ਕੋਈ ਵੇਲਾ ਹੋਵੇ ਕੋਈ ਛੇੜ ਹੋਵੇ ਜਿਹੜਾ ਆਜਵੇਂ ਜਦ ਹੀ ਉਹਨੂੰ ਉੱਠ ਕੇ ਜਦ ਹੀ ਉਹਦੇ ਨਾਲ ਗੱਲਬਾਤ ਕਰਕੇ ਉਹਦਾ ਜਿਹੜਾ ਹੈ ਸਵਾਲ ਜੋ ਵੀ ਉਹ ਵਿਚ ਹੈ ਉਹ ਪੂਰੀ ਗੱਲ ਇਹਨੂੰ ਦੱਸਣਾ ਸਮਝਾਉਣਾ ਇਹ ਦੀਨੇ ਕਿ ਲਾਇਆ ਵੀ ਇਹਨੇ ਵਜੇ ਤੇ 10 ਵਜੇ ਸੀ ਮੈਨੂੰ ਮਿਲ ਨਹੀਂ ਸਕਦਾ ਕੋਈ ਠੀਕ ਹੈ। ਯਾ ਬਾਹਰ ਬੰਦੇ ਕਰ ਸਕਦੇ। ਹੂੰ ਉਹ ਛੱਡ ਕੇ ਆਉਂਦਾ। ਉਹ ਨੂੰ ਮੁਰਦੇ ਹੋਰ ਸਾਡਾ ਇਹੀ ਹੈ। ਦੁਕਾਨਦਾਰ ਦਾ ਤਾਂ ਕਦੇ ਇਹੀ ਹੈ। ਵਪਾਰੀ ਆਂ ਸਾਡਾ 加ਗ ਰੂ ਗਾਗ ਆ ਬਲ ਤੇ ਮੜ ਕੇ ਹਉ ਠੀਕ ਹੈ ਜੀ ਇਹ ਗਾਗ ਰੂ ਕਹ ਜੇ ਬਹਿ ਜਾ ਤੂੰ ਘਟ ਦਾ ਵਿਚਾਰਾ ਬਹਿਦਾ ਹਾਂ ਨਾ ਹਟੇ ਸਤਵੰਤ ਹਰਨਾਮ ਮੰਤਰ ਨਵ ਨਿਦ ਨਾ ਨਿਖਟੇ ਸਤਵੰਤ ਹਰ ਰੂਪ ਉਤਰ ਹਾਂ ਲਿਤੀ ਨਾ ਨਿਕੁੱਟ ਹਾਂ ਨਿਕੁੱਟ ਹਾਂ ਹੂੰ ਰੂਪ ਉਤਰ ਸਤਵੰਤ ਹਰ ਰੂਪ ਉਤਰ ਹੈ ਜਿਹੜਾ ਗੁਰਬਾਣੀ ਹਾਂਜੀ ਗੁਰਬਾਣੀ ਹਰ ਰੂਪ ਉਤਰ ਹੂੰ ਹੂੰ ਇਹ ਸਤਵੰਤ ਸੱਚ ਸੱਚੀ ਬਾਣੀ ਮਿਲਦਾ ਸੱਚ ਹੈ ਨਾ ਸਤਵੰਤ ਦਾ ਸੱਚ ਵਾਲਾ ਹੈ ਉਤਰ ਹੂੰ ਹੂੰ ਲੋੜ ਹੈ ਜੋ ਮਿਲੂਗਾ ਹਮ ਅਲਨਾਮਤਰਾ ਜਿਹੜੇ ਗੁਰਬਾਨੀਆਂ ਸਤਵੰਤ ਦਾ ਅਭਲੇ ਦੀ ਜਮਖਿਆ ਦਾ ਹੋਰ ਕਿਦਾਂ ਜਦੋਂ ਸੱਚ ਮੰਨਦਾ ਠੀਕ ਹੈ ਜੀ ਕੋਈ ਜਦਵੰਤ ਮੁੱਤਲੀਆਂ ਕਦੇ ਵੀ ਹਮ ਹਮ ਗਾਂਦੇ ਖੋਟਾ ਕਦੇ ਵੀ ਖੋਟਾ ਨਹੀਂ ਹੋਊ ਕਦੇ ਇਹ ਸਤਵੰਤ ਦਾ ਤੇ ਇਹਦੇ ਕਦੇ ਵੀ ਝੂਠ ਸਾਫਤ ਨਹੀਂ ਹੋਊ ਅੱਛਾ ਜੀ ਪ੍ਰਵੇਸ਼ਾ ਸਾਚੀ ਰਹੂਏ ਤੇ ਕੋਟਾ-ਖੋਟਾ ਸਾਫਤ ਨਹੀਂ ਹੋ ਸਕਦਾ ਕਦੇ ਵੀ ਹੂੰ ਮੇਰੇ ਚ ਇਹ ਗੱਲ ਸੱਚ ਨਹੀਂ ਹੈ ਮੇਰੇ ਤੇ ਸ਼ੱਕਾ ਨਹੀਂ ਖੜੀ ਕਦੇ ਵੀ ਹੋ ਅਸੀਂ ਕਰਦੇ ਖਾ ਕੇ ਅਰਥ ਉਲਟਾ ਲੇ ਲਾ ਅਸੀਂ ਟਪਲਾ ਖਾ ਕੇ ਹੋਰ ਅਰਥ ਕਰ ਲਈਏ ਤਾਂ ਬਖਰੀ ਹੈ ਪਰ ਇਹਦੇ ਸਹੀ ਅਰਥਾਂ ਵਿੱਚ ਕਦੇ ਖੋਤਦੀ ਹੈ ਹਾਂਜੀ ਗੁਰੂ ਰਾਮਦਾਸ ਤਨ ਸਰਬ ਮੈਂ ਸਹਜ ਚੰਦੂਆ ਤਾਣੀਉ ਗੁਰੂ ਰਾਮਦਾਸ ਤਨ ਸਰਬ ਹਾਂਜੀ ਚੰਦੂਆ ਤਾਣੀਉ ਹੂੰ ਗੁਰੂ ਰਾਮਦਾਸ ਨੇ ਕੀ ਕੀਤਾ ਸਾਰਿਆਂ ਦੇ ਹਿਰਦੇ ਵਿੱਚ ਸਹਜ ਅਵਸਥਾ ਪੈਦਾ ਕਰਤੀ ਹੂੰ ਹੂੰ ਜਿੱਦੇ ਗੁਰ ਸਿੱਖ ਸੀਗੇ ਉਹਨਾਂ ਸੀਗੇ ਜੁੜੇ ਹੋਏ ਗੁਰੂ ਘਰ ਨਾਲ ਸਹਿਜ ਅਵਸਥਾ ਤਾਂ ਸਹਾਇ ਨਹੀਂ ਕਰਦੀ ਸਹਿਜੇ ਚੇਦਵਾ ਟਾਲੇ ਸਹਿਜਾ ਗਿਆਨਤਾ ਦੇਤਾ ਸਾਰਿਆਂ ਨੂੰ ਸਹਿਜਾ ਚਰਨ ਤਾਂ ਕਰਤਾ ਇੰਨਾ ਗਿਆਨ ਦੇਤਾ ਤੇ ਉਹ ਚੇਦਵਾ ਚੰਦੋ ਜਿਹਾ ਨਾ ਚੰਦ ਰੋਸ਼ਨੀ ਚੇਦਵਾ ਰੋਸ਼ਨ ਕਰਤਾ ਹਿਰਦਾ ਸਾਰਿਆਂ ਦਾ ਚੇਦਵਾ ਟਾਣੇ ਹਾਂ ਗੁਰ ਅਰਜਨ ਕਲ ਹਾਂਜੀ ਸੂਰਜ ਵਾਲਾ ਗੱਲ ਤਾਂ ਨਹੀਂ ਹੋਇਆ ਸੂਰਜ ਦਾ ਹੋਊਗਾ ਇਸਨਾਮ ਨਾਲੇ ਉਹਦੇ ਸ਼ਬਦ ਗੁਰੂ ਪ੍ਰਗਟ ਹੋਊ ਸੂਰਜ ਦਾ ਜਾਂ ਚੜੂ ਪਰ ਹਾਂ ਪੂਰਨ ਵਸਿਦੇ ਛਤਰ ਤੇ ਗਿਆਨ ਜਰੂਰ ਹੋ ਗਿਆ ਦੇ ਅੰਦਰ ਗੁਰ ਅਰਜਨ ਕਾਲ ਉਚਰੈ ਤੈ ਰਾਜ ਯੋਗ ਜਸ ਜਾਣਿਓ ਆਹ ਕਲ ਭਗਤ ਕਹਿੰਦਾ ਰਾਜ ਯੋਗ ਦਾ ਰਸ ਜਾਣ ਲਿਆ ਹੂੰ ਤੇ ਤੁਹਾਨੂੰ ਕੋ ਗੁਰ ਰੰਗਦਾਸ ਹੂੰ ਤੋ ਆਹ ਸਾਰਿਆਂ ਨੇ ਕਹਣਾ ਸੀ ਨਾ ਹਾਂਜੀ ਤੇਰੇ ਵੀ ਉੱਤੇ ਸਭ ਕਿਹਾ ਤਾਂ ਥੋੜਾ ਜਿਹਾ ਵਰਕ ਪਿਆ ਜਦੋਂ ਅਖਾਰਿਆਂ ਦੇ ਤਾਂ ਤੈ ਰਾਖ ਵੀ ਜਾਣ ਲਿਆ ਹੂੰ ਇਹ ਗਿਆਨ ਦੀ ਸਟੇਜ ਤੋਂ ਧਿਆਨ ਦੀ ਸਟੇਜ ਹੈ ਧਿਆਨ ਰੱਖ ਬੰਦ ਨਹੀਂ ਟਿਕਦਾ ਠੀਕ ਹੈ ਗਿਆਨ ਦੀ ਗੱਲ ਹੋਰ ਹੈ ਬੁੱਝਣ ਦੀ ਗੱਲ ਹੋਰ ਹੈ ਜਾ ਬੁੱਝਣੇ ਦਾ ਰਾਸ ਆ ਜਾਂਦਾ ਜਦ ਜਨ ਜਦ ਬੁੱਝੇ ਫੇਰ ਆਯੋਗ ਦਾ ਜਸ ਗੋਲਨ ਦਾ। ਹੂੰ ਹੂੰ। ਆਸ ਬੁੱਝਣ ਵਾਲੀ ਚੀਜ਼। ਠੀਕ ਹੈ ਜੀ। ਬੁੱਝਣ ਵਾਲੀ। ਹਾਂਜੀ ਉਹ ਜਾਪੇ ਛਗੀ ਦਾ ਹੈ ਹਾਂਜੀ ਹਾਂਜੀ ਹੁਣ ਹੈ ਜੀ ਸਵਈਆ ਆ ਸਮਾਪਤ ਹੈ ਜੀ ਹੁਣ ਅੱਠਵਾਂ ਸਵਈਆ ਸ਼ੁਰੂ ਹਾਂਜੀ ਭੈ ਨਿਰਭਉ ਮਾਣਿਓ ਲੱਖ ਮੈਂ ਅਲਖ ਲਖਾਇਓ ਭੈ ਨਿਰਭਉ ਬਾਣਿਓ ਰਹਿ ਕੇ ਨਿਰਭੈ ਮੋਕਮਨੇ ਵੀ ਚੱਲ ਕੇ ਜਿਹੜੇ ਪਹਾਅਵਸਥਾ ਪ੍ਰਾਪਤ ਕਰ ਲਈ ਠੀਕ ਹੈ ਜਿਹੜੇ ਪਹਾਅਵਸਥਾ ਵਿਰਪਹਾਵ ਉਹ ਕਿਹੜਾ ਹੈ ਨਾ ਸੁਖ ਹਾਂਜੀ ਉਹ ਮਾਰਦੇ ਹਨ ਪਰਮ ਸੁਖ ਪਰਮ ਸੁਖ ਉਹ ਗੋਲ ਨੇ ਜਿਹੜੇ ਪਹਾਅਵਸਥਾ ਪਰਮ ਸੁਖ ਹੈ ਉਹ ਗੋਲ ਨੇ ਹੂੰ ਲੱਖ ਮੈਂ ਸਾਰੇ ਅਰਦਾਸ ਤੈਨੂੰ ਹਰਦੀਦਾ ਅਲੱਖ ਠੀਕ ਹੈ ਜੀ ਕੱਟ ਕੱਟ ਮੈਂ ਹਰ ਜੂਗ ਅਸਾ ਸਤਿ ਤਰ ਕਰੋ ਪੁਕਾਰ ਹੂੰ ਹੂੰ ਦੀਨ ਹੂੰ ਹੂੰ ਲੱਖਰੂ ਨੇ ਵਿੱਚ ਠੀਕ ਹੈ ਜੀ ਲੱਖਾਂ ਵਿੱਚ ਹੋਈ ਨਹੀਂ ਅਗਮ ਅਗਮ ਗੋਚਰ ਹਾਂਜੀ ਗਤ ਆ ਅਗਮ ਅਗਮ ਗੋਚਰ ਗਤ ਗੰਭੀਰ ਸਤਗੁਰ ਪਰਚਾਇਓ ਅਗਮ ਗੋਚਰ ਹੈ ਜਿਹੜਾ ਜਿੱਦ ਗੰਭੀਰ ਗਤੀ ਹੈ ਹਾਂਜੀ ਸੱਚ ਬੋਲਦਾ ਉਹਦੇ ਪਰਚਾ ਪਰਚਾ ਦਿੰਦਾ ਹੂੰ ਦਾ ਪਰਚਾ ਲਗਾ ਠੀਕ ਹੈ ਜੀ ਗੁਰਬਾਣੀ ਦਾ ਪਰਚਾ ਲਾ ਰਹੇ ਨੇ ਲੋਕਾਂ ਨੂੰ ਸਾਰਿਆਂ ਨੂੰ ਕਿਹਨੂੰ ਪਰਚਾ ਲਾਇਓ ਕਹਿੰਦੇ ਨਾ ਬੱਟ ਬਰਸੇ ਕੋ ਆ ਫਿਰਿਓ ਹਾਂਜੀ ਕਿਹਨੂੰ ਪਰਚਾ ਲਾਇਓ ਹਾਂ ਹਾਂ ਉਹਨਾਂ ਨੇ ਹਾਂਜੀ ਆ ਕਹਿੰਦੇ ਸਾਨੂੰ ਸਾਨੂੰ ਗੁਰਵਾਂਜਣ ਨੇ ਪਰਚਾ ਲਾ ਦਿੱਤਾ ਗੁਰਬਾਣੀ ਦੀ ਵਿਚਾਰ ਦਾ ਗੁਰਬਾਣੀ ਦੀ ਵਿਚਾਰ ਤੇ ਬਣ ਪਰਚਾ ਗਿਆ ਉਹ ਤਾਂ ਕੋਈ ਮਿਲਡ ਉਹਨੇ ਐਨੀ ਵਿਚਾਰੀ ਦੀ ਬਾਣੀ ਬਾਣੀ ਐ ਵਿਚਾਰੀ ਦੀ ਐ ਇਹਦੇ ਅਰਥ ਐ ਹੁਣਗੇ ਐ ਨਹੀਂ ਹੁੰਦੇ ਥੋੜੀ ਜੀ ਗੁਰਮੁਖੀ ਭਾਸ਼ਾ ਸਮਝਾਤੀ ਪਰ ਇਹਨਾਂ ਵਿਚਾਰੀ ਅਰਥ ਕਰ ਲੈਂਦੇ ਆ ਉਹ ਤੇ ਦੱਸਦੇ ਸਾਰੇ ਫੱਡੇ ਫੱਡੇ ਸਮਝਾਉਂਦੇ ਜੀ ਆਓ ਫੱਡੇ ਸਮਝਾਤੇ ਸਮਝਣ ਲੱਗੀ ਹਾਂ ਹਾਂ ਹਾਂਜੀ ਗੁਰ ਪਰਚੇ ਪਰਵਾਨ ਰਾਜਮਹਿ ਜੋਗ ਕਮਾਇਓ ਆ ਗੁਰ ਪਰਚਾ ਜਿਹੜਾ ਸੀਗਾ ਹੂੰ ਇੱਥੇ ਗੁਰੂ ਨੇ ਜੋੜਿਆ ਸੀ ਜਿਹੜੇ ਪਚਾਵੇ ਚ ਸ਼ਬਦ ਵਿਚਾਰ ਚ ਹੋ ਗਈ ਤੇ ਰਾਜ ਗੱਲ ਹੂੰ ਹੋ ਗਈ ਤੇ ਰਾਜ ਰਾਜਮਹਿ ਜੋ ਕਮਾਇਓ ਆ ਜੋ ਕਮਾਇਆ ਜੁਰਗੇ ਚਤਵਾਂ ਨੇ ਕਹੋ ਗਿਆ ਹੂੰ ਉਹ ਕੁਜ ਰਾਜ ਹੈ ਇੱਕ ਬੰਦੇ ਵਿੱਚ ਤਾਂ ਹੋ ਗਿਆ ਠੀਕ ਹੈ ਜੀ ਉਹ ਵਿਚ ਰਹਿ ਕੇ ਇੱਕ ਬੰਦੇ ਵਿੱਚ ਜੁੜਿਆ ਹੋਇਆ ਜਿਹੜਾ ਜਿਹੜਾ ਉਹ ਕੋਬ ਜੁੜਿਆ ਰਾਜ ਜੋਗ ਹੈ ਉਹ ਪਰ ਬੇਚੰਦੇ ਪਾਲ ਜਿਹੜੇ ਜੁੜਿਆ ਹੋਇਆ ਠੀਕ ਹੈ ਜੀ ਅਪਣੇ ਚਰਦਾ ਪਾਲ ਦੀ ਰਾਜ ਹੈ ਹਕਮ ਰਾਜ ਗੁਰ ਤਨ ਸਰ ਸੁਪਰ ਭਰ ਭਰਾਇਓ ਤਨ ਤਲ ਕੋਰ ਤਲ ਐ ਤਨ ਦਾ ਕਾਂਢੇ ਕੋਰ ਤਲ ਗੁਰੂ ਨਾਨਕ ਦੇਵ ਜੀ ਕੋਲ ਇਤਰ ਕੋਰਾ ਹੂੰ ਹੂੰ ਕਾ ਅਰਜਨ ਦੇਵ ਜੀ ਤਲ ਹੈ ਤੂੰ ਹੂੰ ਹੂੰ ਤੂੰ ਆਪਾਂ ਸਰ ਸੁਪਰ ਪਰ ਆਇਓ ਜਿਹੜਾ ਹਿਰਦਾ ਕਿਸੇ ਚੀਜ਼ ਨਾਲ ਆ ਫੁੱਲ ਕਰ ਦੁੱਤਾ ਹੂੰ ਹੂੰ ਐਨਾ ਭਰਦਾ ਕਿ ਡੁੱਲ ਡੁੱਲ ਪੈਦਾ ਗਿਆ ਹੁਣ ਬਾਦ ਹੂੰ ਹੂੰ ਪਾੜ ਡੁੱਲ ਪੈਂਦਾ ਗਿਆ ਨਾ ਡੁੱਲ ਡੁੱਲ ਭਰਦਾ ਜਿਵੇਂ ਦਸਰਿਆ ਬਾਹਰ ਉਹ ਬਾਹਰ ਕੱਲ ਪਿਆ ਗਿਆ ਨਾ ਸਵਾ ਹੁਣ ਐਸਾ ਭਰ ਗਿਆ ਹਿਰਦਾ ਪਾਣੂ ਤੁਰ ਪਿਆ ਦੁੱਬੜ ਵਾਲੀ ਹਿਰਦੇ ਤੋਂ ਹੁਣ ਹਰ ਕਾ ਭਗਤ ਪ੍ਰਗਟੈ ਦੇਈ ਛਪੈ ਹਮ ਅਗਾਂ ਤਾਂ ਲਗਾਇਆ ਲੋਕੇ ਲੋਹੀ ਜੇ ਕੋ ਰਖੇ ਲਕਾਏ ਕਿਉਂ ਲਕਾਏ ਨਹੀਂ ਜਾਂਦਾ ਇਨਾ ਭਰ ਕੇ ਲਕੋਵੇ ਕਿ ਵੀ ਇਹ ਤੇ ਛਲਕਦੇ ਬਾੜ ਕਾਹ ਦਾ ਪ੍ਰਮਾਣ ਜੇ ਕਿਸੇ ਦੇ ਅੰਦਰ ਗਿਆਨ ਦਾ ਕਣਕਾ ਚਲਿਆ ਜਾਵੇ ਹੂੰ ਉਹਦਾ ਸਬੂਤ ਇਹ ਹੈ ਹੂੰ ਹੂੰ ਪ੍ਰਮਾਣ ਦੀ ਦਾ ਪ੍ਰਮਾਣ ਸਬੂਤ ਹੀ ਹੁੰਦਾ ਹਾਂਜੀ ਅਜਿਹੇ ਦਾ ਜਿਹੜੇ ਉਹ ਅਜਾਜ ਜਿਹੜੇ ਉਹ ਹੂੰ ਫਰ ਸਭ ਤੋਂ ਜਾਲੀ ਨਹੀਂ ਨਾ ਜਾ ਸਕਦੀ ਜਾਲੀ ਉਹ ਜਾਲ ਦੁੱਤੀ ਹੂੰ ਹੂੰ ਪਰਮਦਾ ਨਾਲ ਆਖਦੀ ਨਹੀਂ ਇਹ ਹੁੰਦਾ ਕਰਦਾ ਪਰਮ ਨੂੰ ਜਲਦਾ ਕਿਸੇ ਦਿਨ ਉਹ ਜਾਲ ਕੇ ਰੱਖਦਾ ਹੂੰ ਹੂੰ ਉਹ ਪਰਮ ਨੂੰ ਜਾਲੇ ਦਿਖਾਵੇ ਲਾਈਟ ਜਲਦੀ ਹੈ ਕਹਿੰਦਾ ਲਾਈਟ ਜਗਾ ਦਿਓ ਕੋਈ ਕਹਿੰਦਾ ਮੇਰਾ ਜਾਲ ਦਿਓ ਹੂੰ ਲਾਈਟ ਕਰ ਦਿਓ ਜਾਲ ਠੀਕ ਹੈ ਜੀ ਲਾਈਟ ਜਗਾ ਦਿਓ ਤੇਰਾ ਵੀ ਕੋਈ ਨਾ ਜਗਾ ਦਿਓ ਅਸਲ ਤੇ ਲਾਈਟ ਨਹੀਂ ਜੜਾਈ ਜੜਾਇਆ ਤੇ ਰਾਤ ਸੀ ਬੋਲੀ ਦਾ ਫਰਕ ਆ ਦੇਖੋ ਕੀ ਕਹਤਾਂ ਕੀ ਜੀ ਬੋਲੀ ਦਾ ਫਰਕ ਹਮ ਫਰਕਰ ਬੋਲੀ ਦਾ ਹਾਂਜੀ ਲਾਈਟ ਦਾ ਪ੍ਰਗਟ ਹੋਈਆ ਰੋਸ਼ਨੀ ਦਾ ਦਾ ਹਨੇਰਾ ਹੋਦਿਆ ਸੰਸਾਰ ਆ ਜਾਰ ਬੰਦਾ ਜਾਲ ਲੱਤਾ ਬੋਲੀ ਦਾ ਫਰਕ ਹਾਂਜੀ ਇਹ ਗੁਰਮੁਖੀ ਬੋਲੀ ਆ ਅਰੇ ਜੀ ਇਹ ਨਾ ਲਾਈਟ ਜਾਲ ਦੋ ਹੂੰ ਹੂੰ ਉਹ ਜਿਹੜੀ ਜੀ ਜਾਲਦੀ ਉਹ ਤਾਂ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਜੜੀ ਤਾਂ ਖਤ ਜੜੀ ਤਾਂ ਖਤਮ ਹੋ ਗਈ ਹੁੰਦੀ ਹੈ ਹੂੰ ਤਾਂ ਹੈਗੀ ਹੈ ਕੀ ਹੈ ਇਹਨਾਂ ਅਗਰ ਕੀ ਰੋਸ਼ਨੀ ਹੋ ਗਈ ਠੀਕ ਹੈ ਸਤ ਸਰ ਸੰਤੋਖ ਸਮਾਇਓ ਹੱਥ ਤੋਗਦੇ ਜਨ ਉਹਦੇ ਸਮਾ ਗਿਆ ਹੂੰ ਉਹ ਜਦ ਭਰ ਬਜੜ ਸੀ ਮਨ ਆ ਸਰ ਸਤਿਉਕ ਸਮਾਇਓ ਹਾਂ ਜੀ ਗੁਰ ਅਰਜਨ ਕਲ ਉਚਰੇ ਤੈ ਸਹਜ ਜੋਗ ਨਿਜ ਪਾਇਓ ਬਨ ਕਲ ਉਚੜਾ ਕਲ ਪਟ ਕਹਿੰਦਾ ਹੈ ਗੁਰ ਅਰਜਨ ਤਾ ਕੀ ਪਾਇਆ ਸਹਜ ਜੋਗ ਹਾਂ ਹਾਂ ਅਰ ਉਚੜਾ ਪਾਇਓ ਯੋਗ ਅਨਿਤ ਪਾਇਓ ਦੇਖੋ ਬਈ ਆਪਣੇ ਆਪ ਨਾਲ ਜੁੜਿਆ ਅਨਿਤ ਦਾ ਯੋਗ ਹੈ ਕਿਸੇ ਰੱਬ ਨਾਲ ਨਹੀਂ ਜੁੜਿਆ ਕਿਸੇ ਪਰਮੇਸ਼ਰ ਨਾਲ ਨਹੀਂ ਜੁੜਿਆ ਅਨਿਤ ਯੋਗ ਹੈ ਹੂੰ ਹੂੰ ਇਹ ਹੈਲੋ ਹੈਲੋ ਹਾਂ ਸਾਇ ਯੋਗ ਅਨਿਤ ਪਾਇਓ ਆਪਣੇ ਨਾਲ ਹੋ ਠੀਕ ਜੀ ਸਹਿਜ ਯੋਗ ਇਹ ਗੱਲ ਜਿਹੜੀ ਹੋ ਗਿਆ ਹੈ ਜਿਹੜਾ ਨੇ ਕੋਈ ਨਹੀਂ ਜੋ ਮੇਲ ਹੈ ਨਾ ਉਹ ਜੋਗ ਦੀ ਹੈ ਅਸਲ ਚ ਉਹਨੂੰ ਸਮੋਲਣਾ ਕਹਿੰਦੇ ਨੇ ਹੂੰ ਕੋਈ ਸ਼ਬਦ ਸਮਾਗ ਆਇਆ ਬੰਨ ਜਾਣ ਕੋਈ ਜੀ ਹੂੰ ਸ਼ਬਦ ਸੁਰਤ ਭਵ ਸਾਗਰ ਕਰੀਆ ਹੂੰ ਹੈ ਜੋਗ